ਜੋ ਜਾਣੇ ਤੈ ਸਦਾ ਸੁਖ ਹੋਏ ਆਪ ਮਿਲਾਏ ਲਵੇ ਲਵੇ ਪ੍ਰਭ ਸੁਏ ਜੋ ਜਾਣੇ ਤਸ ਕੋ ਸੁਖ ਹੋਏ ਜਿਹੜਾ ਇਹ ਜਾਣ ਲਵੇ ਜੋ ਜਾਣੇ ਤੈ ਸਦਾ ਸੁਖ ਹੋਏ ਜੋ ਸਤ ਪਦੇ ਨੇ ਉੱਤਲੇ ਇਸ ਅਸਵਰੀ ਜਿਹੜਾ ਉੱਤਲੇ ਐ ਦੋ ਤਿੰਨ ਪੜਾਣ ਨੂੰ ਸਮਝ ਲਵੇ ਜੋ ਜਾਣੇ ਜੋ ਜਾਣੇ ਤੈ ਸਦਾ ਸੁਖ ਹੋਏ ਤੈ ਸਦਾ ਸੁਖ ਜਿਹੜਾ ਇਹ ਮੰਨ ਲਵੇ ਦੇ ਦਰਗਾਹ ਦਾ ਜੋ ਕੀਤਾ ਪ੍ਰਵਾਨ ਹੋਣਾ ਚਾਹੀਦਾ ਜੋ ਦਰਗਾਹ ਦੇ ਟੀਤੇ ਨੂੰ ਪ੍ਰਵਾਨ ਮੰਨਵੇ ਪਰਮਾਤਮਾ ਕਰੇ ਪਾਣੇ ਨੂੰ ਪਛਾਣ ਕਰਕੇ ਮੰਨੇ ਉਹਨੂੰ ਸਦਾ ਸੁਖ ਸਦਾ ਸੁਖ ਹੋਏ ਮਿਲਾਏ ਦੇ ਪ੍ਰਭ ਸੋਏ ਫਿਰ ਉਹ ਪ੍ਰਭ ਨੂੰ ਆਪ ਬੁਲਾਉਂਦਾ ਜੋ ਪਾੜੇ ਜਾ ਹੁਕਮ ਜਾ ਜਾ ਉਹ ਕੋ ਜੇ ਸਮਾ ਜਾ ਨੇ ਪ੍ਰਭ ਸੋਏ ਉਤਨਵੰਤ ਕੁਲਵੰਤ ਪਤੀਵੰਤ ਉਹ ਤਨਵਤ ਤਾਂ ਗਿਆਨਵਾਨ ਹੈ ਕੁਲਵੰਤ ਤਾਂ ਉੱਚੀ ਕੁਲ ਵਾਲਾ ਹੈ ਪਤੀਵੰਤ ਤਾਂ ਇੱਜ਼ਤ ਵਾਲਾ ਹੈ ਜੀਵਨ ਮੁਕਤ ਜਿਸ ਰਿਰੇਤਕ ਵੰਤ ਜੀਵਨ ਮੁਕਤ ਹੈ ਜਿਸ ਰਿਰੇਤਕ ਪਗਵੰਤ ਹੈ ਉਹ ਉਹ ਇਸਲੀਵਾਂ ਆ ਇਹ ਦੇਖਦੇ ਮਤਲਬਾ ਪੂਰਬੰਭ ਜਿਹੜਾ ਹੋ ਗਿਆ ਗੁਰਮੁਖੀ ਦੀ ਗੱਲ ਚੱਲਦੀ ਗੁਰਮੁਖੀ ਦੀ ਗੱਲ ਚੱਲਦੀ ਜਿਹਦੇ ਜਾਣੇ ਕੋ ਜਿਸ ਜਾਣਿਆ ਤੁਸੀਂ ਜਿਆ ਆ ਆ ਜੀਵਨ ਬੋਤ ਜਿਸ ਰਿਦੇ ਭਗਵਾਨ ਜੀਵਨ ਬੋਤ ਹੁੰਦੇ ਜਿਸ ਜਿਹਦੇ ਦੇਦਾ ਕਿ ਭਗਵਾਨਤਾ ਹੈ ਜੀਵਨ ਬੋਤ ਜਿਹਦੇ ਹਦ ਵਿੱਚ ਭਗਵਾਨਤਾ ਭਗਵਾਨ ਤੇ ਜਿਹੜਾ ਹੁੰਦਾ ਨਾ ਜਿਹੜਾ ਬੰਦਾ ਇਹੀ ਭਗਵਾਨਤਾ ਹੁੰਦਾ ਉਹ ਆਪਾ ਗਾਉਂਦਾ ਆ ਆਪਗਮਤ ਹੁੰਦਾ ਆਵੇ ਝੂਠੇ ਜਰਾਮ ਝੂਠੇ ਝੂਠੇ ਵਰ ਆਪਾ ਗੇ ਵਰਦਾ ਕੌਣ ਹੈ ਵਰਦਾ ਉਹ ਸੱਚਾ ਹੋ ਕੇ ਵਰਦਾ ਹੈ ਜਿਹੜਾ ਜੀਵਨ ਮੁਕਤ ਹੈ ਜੇ ਮਨ ਸੁਚਿਆਰਾ ਹੋ ਕੇ ਸੱਚਾ ਹੋ ਕੇ ਵਰਦਾ ਮੁਕਤ ਹੈ ਜੇ ਕੂੜਿਆਰਾ ਝੂਠਾ ਵਰਦਾ ਫਿਰ ਜੰਮਣ ਵਾਲਾ ਹੈ ਆਹਾਂ ਜੂਠੇ ਜਾਣੇ ਵੀ ਜੂਠੇ ਝੂਠੇ ਪਰ ਅਪਰ ਅਪਾ ਗਏ ਕੋਪਟਿਆ ਸੂਚਾ ਕਮ ਥਾਉ ਜਹਾਂ ਪੈਸੋਂ ਕੋ ਜਨ ਖਾਉ ਸੱਚ ਇਹਨਾ ਕੀਏ ਜੋ ਬਹਿਨ ਜੋ ਪਿਡਾ ਤੋ ਸੱਚੇ ਸੇ ਇਨਾਨ ਕਾ ਜਨਮ ਹਵਸਿਆ ਸੋਚ ਸੱਚ ਝੂਠ ਇਥੋ ਡਿਫਰੈਂਸ ਉਹ ਤਰਵੰਤ ਕੁਲਵੰਤ ਭਗਵੰਤ ਜੀਵਨ ਮੁਕਤ ਜਿਸ ਰਿਦੇ ਭਗਵੰਤ ਜੀਵਨ ਮੁਕਤ ਤਰ ਤਰ ਕੋਲ ਵੰਤ ਪਤਵੰਤ ਜੀਵਨ ਮੁਕਤ ਕਿਦੇ ਹਦ ਤੱਕ ਪਹੁੰਚਾ ਜਿਹੜਾ ਬਹੁਤ ਜਿਹੜਾ ਹੈਗਾ ਭਗਾ ਵਾਲਾ ਜਿਹੜਾ ਜੀਵਨ ਮੁਕਤ ਅਵਸਥਾ ਪ੍ਰਾਪਤ ਕਰ ਗਿਆ ਵਰਨੇ ਜੀਵਨ ਮੁਕਤ ਅਵਸਥਾ ਪ੍ਰਾਪਤ ਕਰ ਹੈ ਧੰਨ ਧੰਨ ਧੰਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਧੰਨ ਧੰਨ ਧੰਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਿਸ ਪ੍ਰਸਾਦ ਜਬ ਸਭ ਜਗਤ ਤਰਾਇ ਬਹੁਤ ਉਲਟੀ ਦੀ ਗੱਲ ਹੈ ਹਾਂ ਉਹ ਜਿਸ ਪ੍ਰਸਾਦ ਨੂੰ ਜਾਣਦੇ ਨਾਲ ਜਗਤ ਹੀ ਕਰਦਾ ਤਨ ਤਨ ਤਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਜਿਸ ਪ੍ਰਸਾਦ ਜਬ ਸਭ ਜਗਤ ਤਰਾਇਆ ਪਹਿਲਾ ਪ੍ਰਸਾਦ ਦਰਗਾਹ ਚੋਂ ਭੜਿਆ ਕਬੀਰ ਉਹਨੇ ਦਿੱਤਾ ਸਭ ਸਾਥ ਨੂੰ ਪ੍ਰਸਾਦ ਤਾਂ ਕਬੀਰ ਨੂੰ ਮਿਲਿਆ ਸੀ ਪ੍ਰਸਾਦ ਕਬੀਰ ਵਾਸਤੇ ਆਇਆ ਸੀ ਜਿਸ ਦੀ ਬਰਕਤ ਖਾਣੇ ਅਸੰਖ ਅਸੰਖ ਕਰੋੜਾਂ ਨੇ ਕਬੀਰ ਦਾ ਪ੍ਰਸਾਦ ਨਹੀਂ ਪ੍ਰਸਾਦ ਰਖਾਦਾ ਸੀ ਕਬੀਰ ਤੇ ਵਰਸਿਆ ਸੀ ਤੁਸੀਂ ਤਾਂ ਵਰਸਿਆ ਸੀ ਨਾ ਗੁਰਦੀਨੀ ਵਾਸਤੇ ਕਬੀਰ ਕਬੀਰ ਕੋਲ ਕਬੀਰ ਦਾ ਪ੍ਰਸਾਦ ਨਹੀਂ ਸੀ ਕਬੀਰ ਨੂੰ ਜੋ ਪਿਆ ਸੀ ਪ੍ਰਸਾਦ ਉਹਨੇ ਵੱਡ ਤਾ ਫਾਕੇ ਖਾਹੋਂ ਖਰਚੇ ਨਾਲ ਮਿਲ ਪਈ ਦਾ ਵੰਡ ਕੇ ਖਾਦਾ ਕਾਲ ਖਾਇ ਕੁਛ ਨਹੀਂ 50 ਤੋਂ ਖਾ ਉਹ ਖਰਚੇ ਉਹ ਰੰਗੜ ਪਾਈ ਤੋੜਦਾ ਵਧੋ ਜਾਂਦਾ ਤੋੜਦਾ ਵੀ ਵਧ ਗਿਆ ਉਹ ਪ੍ਰਸ਼ਾਦ ਜਿਹੜਾ ਕਬੀਰ ਨੂੰ ਮਿਲਿਆ ਸੀ ਜਿਹੜਾ ਨਾਨਕ ਨੂੰ ਪ੍ਰਸ਼ਾਦ ਮਿਲਿਆ ਸੀ ਗੁਰ ਪ੍ਰਸ਼ਾਦ ਉਹ ਗਾਂ ਦੇਦਾ ਉਹਨੇ ਜਿਸ ਪ੍ਰਸ਼ਾਦ ਸਭ ਜਗਤ ਪ੍ਰਸ਼ਾਦ ਤਾਂ ਨਾਨਕ ਲੈ ਗਿਆ ਇੱਕਦੋ ਚਾਰ ਦਾ ਸਾਰਾ ਸੰਸਾਰ ਉਹ ਜਿਹੜਾ ਪ੍ਰਸਾਦ ਲੈ ਗਿਆ ਨਾ ਨਾਨਕ ਦੇ ਦਰਗਾਹ ਤੋਂ ਜਿੱਥੋਂ ਵੀ ਉਰੇ ਵੰਡਦਾ ਬਾਹਰ ਉਹ ਨਾਲੇ ਵਧੀ ਗਿਆ ਨਾਲੇ ਖਈ ਗਿਆ ਨਾਲੇ ਖੜਾਈ ਗਿਆ ਨਾਲੇ ਵਧੀ ਗਿਆ ਉਹਦੇ ਨਾਲ ਸੰਸਾਰ ਧਰ ਗਿਆ ਐਂ ਕਰਾਂਗੇ ਇਹਦੇ ਐਨੇ ਵੀ ਨਾਨਕ ਪ੍ਰਸਾਦ ਦਿੱਤਾ ਰਿਹਾ ਹਾਂ ਉਹ ਪ੍ਰਸਾਦ ਗੁਰ ਉਹ ਜਿਹੜਾ ਗੁਰ ਹੈ ਤੇ ਕੱਲਾ ਪ੍ਰਸਾਦ ਕਹਿਤਾ ਅਸਲ ਜੋ ਘੁਰ ਪ੍ਰਸਾਦ ਹੈ ਨਾਨਕ ਘੋੜਾ ਉਹਨਾਂ ਪ੍ਰਸਾਦ ਦੇਤਾ ਨਾਨਕ ਘੋੜਾ ਗੁਰ ਪ੍ਰਸਾਦ ਮਿਲ ਗਿਆ ਜਿਹੜਾ ਪ੍ਰਸਾਦ ਲੈ ਲਵੇ ਕਿਤੋਂ ਪ੍ਰਾਪਤ ਕਰ ਲਵੇ ਸੱਚਖੰਡ ਤੋਂ ਗੁਰ ਹੈ ਉਹ ਸਤਗੁਰ ਹੈ ਸਤਪੁਰ ਵਿਦਿਆ ਚਾਲੇ ਹਾ ਜਰ ਪ੍ਰਸਾਦ ਸਭ ਜਗਤ ਜਨ ਆਵਣ ਦਾ ਇਹ ਸਵਾਉ ਜਨ ਕੇ ਸੰਚਿਤ ਆਵੇ ਨਾ ਜਨ ਆਵਣ ਦਾ ਇਹ ਦਾ ਸਵਾਤ ਕੀ ਹੁੰਦਾ ਪ੍ਰਸਾਦ ਪ੍ਰਾਪਤ ਕਰ ਪ੍ਰਸਾਦ ਨਾ ਪ੍ਰਸਾਦ ਲੈ ਲੈ ਜਾਂਦੇ ਮੜ ਗਿਆ ਕਿ ਪੈ ਗਿਆ ਉਹਦੀ ਜੋੜੀ ਚ ਸੱਚਖੰਤੋ ਨਾਮ ਹੈ ਪ੍ਰਸਾਦ ਆ ਨਾਨਕ ਮੰਗੇ ਨਾਮ ਦਾ ਨੂੰ ਉਹ ਨਾਮ ਦਾ ਪ੍ਰਸਾਦ ਮਿਲ ਗਿਆ ਨੇ ਫੰਡ ਗਿਆ ਫਿਰ ਚੰਗਲਾ ਹਾਂਜੀ ਜਨ ਆਵਣ ਗਏ ਇਹ ਸੋਵ ਜਨ ਕੇ ਸੰਚਿਤ ਆਵੇ ਨੋ ਜਨ ਕੇ ਜਨ ਦੀ ਸੰਗਤ ਕਰ ਨਾਲ ਨਾਮ ਚਿੱਤ ਵਿੱਚ ਪ੍ਰਵੇਸ਼ ਕਰ ਜਾ ਤੇ ਵਿਦਾਂ ਦਾ ਗਿਆਨ ਤੇ ਚਿੱਤ ਵਿੱਚ ਗਿਆਨ ਆਵਣ ਦਾ ਬਢੋਰਤ ਵੀ ਇਹੀ ਹੈ ਜਦ ਜਨ ਆਉਣ ਜਨ ਨੇ ਜਨਮ ਲੈਣ ਦਾ ਜਿਹੜਾ ਬਢੋਰਤ ਹੁੰਦਾ ਉਹ ਇਹ ਹੁੰਦਾ ਵੀ ਹੋਰ ਕੁਝ ਬੰਦੇ ਆਦੇ ਮਨ ਦੇ ਵਿੱਚ ਇਹ ਜਿਹੜਾ ਹੈ ਨਾ ਨਾਮ ਦੇ ਗਿਆਨ ਚ ਤਾਵਾ ਨਾਮ ਉਹਨਾਂ ਦੇ ਚਿੱਤ 'ਚ ਹੋਰ ਨਾਮ ਮਜ਼ਬੂਤ ਹੋ ਜਾਂਦਾ ਮਜ਼ਬੂਤ ਹੁੰਦਾ ਪਹਿਲਾਂ ਹੀ ਹੈ ਜੇ ਪਹਿਲਾਂ ਹੋ ਮਜ਼ਬੂਤ ਤਹਿ हो ਮਜ਼ਬੂਤ ਹੋ ਜਾਂਦਾ ਹੁੰਦਾ ਪਹਿਲਾਂ ਹੀ पहला ਜੇ ਪਹਿਲਾ ਚੀਜ਼ ਜਿਹੜੀ ਹੋਵੇ कर ਨੂੰ ਮਜ਼ਬੂਤ मजबूत وہی चीज ہو سکتی ہے جی پہلا ہوے جی دا وجود ہوے ہن کوئی بٹ پئی ہوے اسوں مضبوط کر لو تھوڑی مٹی رکھ دوتے کوئی چیز مضبوط کیتی جا سکتی ہے پر پہلا ہوے تاں صحیح اس کر کے جیہڑے اندر سچ ہے وہ سچ مضبوط ہو جندا ہے جے اندر سچ نہیں پہلا جھوٹ دے میں رہن ਜਨ ਕੇ ਸਾਮਣ ਚ ਤਾਵਾ ਨਾ ਨਾ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤੇ ਜਨ ਕੋ ਆਪ ਮੁਕਤ ਮੁਕਤ ਕਰੇ ਸੰਸਾਰ ਆਪ ਮੁਕਤ ਆਪ ਕਾਰਨ ਕਾਬੂ ਪਾ ਲਵੇ ਆਪਣੇ ਮਨ ਦੇ ਉੱਤੇ ਕਾਬੂ ਕਰ ਲਵੇ ਮਨ ਕਾਬੂ ਕਰਨਾ ਮੁਕਤੀ ਹੈ ਰਕੀ ਜੇ ਮਨ ਬੇ ਹੈ ਤਾਂ ਮੁਕਤੀ ਨਹੀਂ ਮਨ ਕਾਬੂ ਹੈ ਮੁਕਤੀ ਅਸਲੋਂ ਵੀ ਹੋਤਾ ਮਹ ਨਹੀਂ ਹੈ ਵਾਦੀ ਹੋਇਆ ਹੋਇਆ ਜੇ ਮਨ ਕੰਟਰੋਲ ਜਮੂਤੀ ਹੈ ਚਾਹੇ ਨੂੰ ਕਰਨਾ ਹੀ ਵਧਾ ਲੋ ਗੱਲ ਨੂੰ ਐਸੇ ਦਾ ਕੁੱਲ ਬਲਾ ਕੇ ਮਨ ਤੇ ਕੰਟਰੋਲ ਕਰਨੇ ਆਪ ਮੁਕਤ ਮੁਕਤ ਕਰੇ ਸਭਾ ਨਾਨਕ ਤੇ ਸੰਜਨ ਕੋ ਸਦਾ ਜਿਹੜਾ ਆਪ ਮੁਕਤ ਹੈ ਉਹ ਦੂਜਾ ਨੂੰ ਮੁਕਤੀ ਦਾ ਮਾਰਗ ਦੱਸ ਸਕਦਾ ਮੁਕਤ ਕਰੇ ਦਾ ਮਤਲਬ ਹੈ ਮੁਕਤ ਕਰਨ ਦੀ ਵਿਧੀ ਦੱਸ ਸਕਦਾ ਉਹ ਮੁਕਤ ਨਹੀਂ ਕਰ ਸਕਦਾ ਜਿਵੇਂ ਆਪ ਮੁਕਤੀ ਲਈ ਜਾਓਗੇ ਉਹਨਾਂ ਨੂੰ ਉਦਕਰਸਾ ਆਪ ਮੁਦਰੇ ਵਿੱਚ ਹੋਇਆ ਜਿਵੇਂ ਆਪ ਮੁਕਤ ਹੋਇਆ ਉਹਨਾਂ ਦਾ ਕਰੂ ਤਾਂ ਹੋ ਨਹੀਂ ਜਿਵੇਂ ਆਪ ਹੋਇਆ ਮੁਕਤ ਕਰੇ ਸਰਦਾਰ ਨਾਨਕ ਤੇ ਜਨਪੁਰ ਸਦਾ ਨਮਸਕਾਰ ਨਾਨਕ ਤੇ ਜਨਪੁਰ ਸਦਾ ਨਮਸਕਾਰ ਉਹ ਜਨ ਸਦਾ ਨਮਸਕਾਰ ਜਿਹੜਾ ਆਪ ਮੁਕਤ ਹੋਵੇ ਮੁਕਤ ਕਰੇ ਸਰਦਾਰ ਨਾਨਕ ਆਪ ਮੁਕਤ ਹੈ ਨਾਡਰੂ ਬਹਿ ਆਦਮੀ ਨੇ ਮੁਕਤੀ ਦੇ ਦਿੱਤੀ ਆਪਣੇ ਬਲਗੁੱਤ ਨਾਲ ਪੜ ਕੇ ਮੁਕਤ ਹੋਣੀ ਸਮਝ ਕੇ ਮੁਕਤ ਹੋਈ ਇੰਨਾ ਫਰਕ ਆਪ ਮੁਕਤਤਾ ਇੰਨਾ ਹੀ ਫਰਕ ਹੁੰਦਾ ਬਾਕੀਆਂ ਨੂੰ ਬਦਦ ਦਿੱਤੀ ਹੈ ਇੱਕ ਆਦਮੀ ਆਪਣੇ ਆਪਣੇ ਬਾਲ ਨਾਲ ਬਾਹਰ ਤੇ ਕੱਢ ਗਿਆ ਇੱਕ ਬੰਦੇ ਨੂੰ ਉਹ ਬਾਹਰ ਫੜ ਕੇ ਨਾਲ ਲਾ ਗਿਆ ਸਾਰਾ ਬੜਾ ਜਿਹਦੇ ਇੱਕ ਬੰਦੇ ਨੂੰ ਥੋੜਾ ਜਾਂ ਸਾਰਾ ਦੇ ਕੇ ਨਾਲ ਲਗਾ ਚੜਾ ਕੇ ਇੱਕ ਗੱਲਾ ਚੜ ਜਾ ਵਸਾ ਇੰਨਾ ਫਰਕ ਪੈਂਦਾ ਜਿਆਦਾ ਜ਼ਬਰ ਕਹਿ ਸਾਰਾ ਦੇ ਸਾਰਾ ਦੇ ਸਕਦਾ ਵਾਲਾ ਮੋਟਾ ਉਹ ਵੀ ਮਾੜਾ ਮੋਟਾ ਜੇ ਚੜਨਾ ਧੂਆ ਵੀ ਚੌਦਾ ਹੋਵੇ ਫਰਕ ਆਂ ਜੇ ਚੜਨਾ ਨਾ ਜਾਉਂਦਾ ਹੋਵੇ ਚੱਕੇ ਉਹ ਨਹੀਂ ਰਿਹਾ ਸਕਦਾ ਉਹ ਤਾਂ ਫਿਰ ਆਪਣਾ ਬਾਹਰ ਬਿਠੀ ਚੱਕ ਹੁੰਦਾ ਆਪਣੇ ਭਾਰੇ ਨਾਲ ਡਰੇ ਅੱਗੇ ਅੱਗੇ ਉਹ ਘਟਾਟ ਫਿਰ ਤੇ ਉਹਦਾ ਜਦ ਬਹੁਤ ਚੌਦਾ ਹੋਵੇ ਉਹਨੂੰ ਮਾੜਾ ਮੋਟਾ ਸਾਰਾ ਦੇ ਸ਼ਕੇ